ਔਖਦ ਨਾਮ ਆਧਾਰ ਅਮੋਲਕ ਪੀ ਜੀ ਮਿਲ ਮਿਲ ਖਾਵੈ ਸੰਤ ਸਗਲ ਕੋ ਦੀ ਨਾਮ ਅਪਾਰ ਅਮੋਲਕ ਪੀ ਜੀ ਜਿਹੜੀ ਦਵਾਈ ਹੈ ਔਖਦ ਹੈ ਨਾਬਦੀ ਔਖਦ ਅਪਾਰ ਦਵਾਈ ਹੈ ਇਹਦਾ ਪਰਲਾ ਪਾਸਾ ਨਹੀਂ ਇਹਦਾ ਅੰਤ ਨਹੀਂ ਹੈ ਅਪਾਰ भैया ਅਪਾਰ 기ਆ ਅਪਾਰ अमूलक अपार है मूल्य लिया है तो ए पी जे कोई अपील वे ए पीली चाहिए जे जिंदगी दी लोड है सा जीवन दी ता आ द्वार ही है को पारमोल अमूलक नाम दी ए पी लो मिल बन लो खावे संत फडल को दी जी ਬਿਲਵਿਲ ਕੇ ਸੰਤ ਆਪ ਖਾਂਦੇ ਨੇ ਤੇ ਉਹਨਾਂ ਨੂੰ ਵੀ ਦਿੰਦੇ ਨੇ ਦਵਾਈ ਫੱਜ ਜੀਵਨ ਕਰਨ ਵਾਸਤੇ ਜੇ ਹਮੇਸ਼ਾ ਜੀਵਨ ਕਿਸੇ ਨੂੰ ਚਾਹੀਦਾ ਤਾਂ ਇਹ ਇਲਾਜ ਹੈ ਹੋਰ ਕੋਈ ਇਲਾਜ ਨਹੀਂ ਸਰੀਰ ਦਾ ਨਹੀਂ ਇਲਾਜ ਕੋਈ ਜੇ ਕੋਈ ਸਰੀਰ ਕਰਕੇ ਜਿੰਦਾ ਰੱਖਣਾ ਚਾਹੇ ਬੈਠ ਇਹ ਨਹੀਂ ਰਹਿ ਸਕਦਾ ਆਤਮਿਕ ਲੈਵਲ ਤੇ ਜ਼ਿੰਦਗੀ ਹਮੇਸ਼ਾ ਵਾਸਤੇ ਰਹੇਗੀ ਹਾਂਜੀ ਠੀਕ ਹੈ ਜੀ ਪਹਿਲੀ ਪੰਕਤੀ ਚ ਲਿਖਿਆ ਹੋਇਆ ਔਖਰ ਨਾਮ ਪਾਰ ਮੂਲਕ ਪੀਜੇ ਇੱਥੇ ਪੀਣ ਦੀ ਗੱਲ ਹੈ ਜੀ ਮਿਲ ਮਿਲ ਖਾਵੇਂ ਸੰਤ ਸਗਲ ਕੋ ਦੀਜੇ ਖਾਣ ਦੀ ਗੱਲ ਆ ਗਈ ਜੀ ਖਾਣ ਪੀਣ ਦੋਵਾਂ ਪਾਸਿਆਂ ਤੋਂ ਮੁਕਤ ਹੈ ਖਾਣ ਵਾਲਾ ਕਹਿ ਸਕਦੇ ਨਾ ਪੀਣ ਵਾਲਾ ਕਹਿ ਸਕਦੇ ਭਾਸ਼ਾ ਸਮਝਣ ਦੀ ਲੋੜ ਹੈ ਜੀ ਉਹ ਤਾਂ ਹੁਣ ਮੰਗਰ ਲੈਵਲ ਤੇ ਆਦਮੇ ਦੇ ਲੈਵਲ ਤੇ ਪੀੜੀਏ ਜੀ ਪਾਣੀ ਕਹ ਲੋ ਚਾਹ ਪੀਣੀ ਕਹ ਲੋ ਜਿਨਨ ਕੋ ਲੱਗੀ ਪਿਆਜ਼ ਅੰਮ੍ਰਿਤ ਸਹੀ ਖਾਣ ਲੱਗੀ ਅੰਮ੍ਰਿਤ ਹਾਂਜੀ ਪਿਆਸ ਤਾਂ ਪੀਦਾ ਆ ਪਰ ਉਹਨਾਂ ਨੇ ਅੰਮ੍ਰਿਤ ਫੇਰ ਉਹਦੀ ਪਤਾਸਾਂ ਦੇ ਬਾਣੀ ਨੂੰ ਬਣਾ ਲਿਆ ਠੀਕ ਹੈ ਜੀ ਪਾਹਲ ਨੂੰ ਅੰਮ੍ਰਿਤ ਕਹਿਣ ਲੱਗੇ ਜੀ ਪਾਹਲ ਨੂੰ ਕਹਿਣ ਲੱਗੇ ਉਹਨਾਂ ਦਾ ਅੰਮ੍ਰਿਤ ਇਹ ਜਾਈ ਸੀ ਨਾ ਘੜੇ ਅੰਮ੍ਰਿਤ ਹੁੰਦੇ ਲਿਖੇ ਹੋਏ ਸ਼ਾਸਤ੍ਰਾਂ ਦੀ ਰਣਥਾ ਇਹ ਬਣਾਤਾ ਹਾਂ ਜੀ ਉਹ ਕਹਿੰਦੇ ਨੇ ਵੀ ਉਹ ਰਖਿਆ ਇਥੇ ਆ ਇੱਕ ਘੜਾ ਆਪਣੇ ਜਿੱਥੇ ਦਰਬਾਰ ਸਾਹਿਬ ਦਾ ਸਰੋਵਰ ਉੱਥੇ ਰਹਿ ਗਿਆ ਸੀ ਹਾਂ ਜੀ ਠੀਕ ਹੈ ਜੀ ਜਿਸੇ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਉ ਬਲਹਾਰੀ ਤਿੰਨ ਜੇ ਹਰ ਰੰਗ ਰਾਵਣੇ ਜਿਸੇ ਪ੍ਰਾਪਤ ਹੋਏ ਜਿਹਨੂੰ ਨਾਮ ਪ੍ਰਾਪਤ ਹੋ ਜਵੇ ਤਿਸੈ ਹੀ ਪਾਵਣੇ ਕੋਈ ਕੋਈ ਪਾ ਸਕਦਾ ਜਿਹਨੂੰ ਮਿਲ ਜੇ ਉਹ ਹੀ ਪਾ ਸਕਦਾ ਜਿਹਨੂੰ ਮਿਲੇ ਹੀ ਨਾ ਪ੍ਰਾਪਤ ਕਿਦੋਂ ਕਰੂਗਾ ਤੇ ਸਹੀ ਪਾਵਣ ਹੈ ਹਰਾਂ ਹੌਮਲੇ ਆਰੀ ਤਿੰਨ ਜੇ ਹਰ ਰੰਗ ਦਾ ਬਲ ਕੋਨਾ ਦੇ ਬਲ ਆਰੀਆਂ ਜਿਹਨਾਂ ਨੇ ਹਰ ਦੇ ਰੰਗ ਚ ਰੰਗੇ ਆਇਆ ਨੇ ਹਰ ਰੰਗ 라ਵਣੀ ਹਰ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਨਾ ਬਤੇ ਰੰਗ ਰੰਗੇ ਰਹਿੰਦੇ ਜਿਸੇ ਪ੍ਰਾਪਤ ਹੋਏ ਪਾਵਣ ਹੈ ਕਿ ਪਾਵਣ ਦਾ ਜੀ ਜਿਹਨੂੰ ਪ੍ਰਾਪਤ ਹੋ ਜਾਣਾ ਉਹ ਪਾਲੰਗਾ अच्छा प्राप्त किने हुंदा है जी गुरु मंगल होए प्राप्त औ के नाम जेड़ा पानी च चलदा उनु प्राप्त हो जांदा तਨ मन ਇੱਥੇ ਹੁਣ ਫਿਰ ਬਲਹਾਰੀ ਆ ਗਿਆ ਹਰ ਹਾਂ ਹਾਂ ਬਲਹਾਰੀ ਤਿੰਨ ਅਰਜ਼ੀ ਤਾਂ ਨਹੀਂ ਦੱਸ ਸਕਦੇ ਦੇ ਸਕਦੇ ਪ੍ਰਾਪਤ ਹੋ ਗਿਆ ਉਹ ਕੁਰਬਾਨ ਠੀਕ ਹੈ ਜੀ ਤੇ ਅਸੀਂ ਪ੍ਰਾਪਤ ਕਰਨ ਦਾ ਤਰੀਕਾ ਦੱਸ ਸਕਦੇ ਹਾਂ ਬਖ ਤੁਹਾਡੀ ਆਪਣੀ ਕਾਲ ਕਮਾਈ ਹੈ ਜੀ ਹਾਂ ਠੀਕ ਹੈ ਜੀ ਇੱਥੇ 22ਵੇਂ ਛੰਦ ਦੀ ਸਮਾਪਤੀ ਹੈ ਜੀ